ਜਿਸ ਤਨ ਕੋ ਚਾਰ ਕੁੰਟ ਉਠਾਵਾਏ ਸੋ ਤਨ ਹਰ ਸੇਵਾ ਦੇ ਪਾਲ ਜਿਸ ਤਨ ਕੋ ਦੇਖੋ ਤਨ ਹੋ ਰਹਾ ਹੈ ਇਹ ਸੰਸਾਰੀ ਤਾਂ ਦੀ ਗੱਲ ਆ ਗਈ ਪਹਿਲਾਂ ਦੁਹੇ ਤਾਂ ਦੀ ਗੱਲ ਆਈ ਸੀ ਚਾਰ ਕੁੰਟਾਂ ਨੂੰ ਬੈਤਾ ਕਿਤੇ ਤਾਂ ਵੀ ਜਮਣ ਜਾ ਸੰਤ ਚਾਰੇ ਆ ਤਾਂ ਨੈਰੋੜਾ ਪੈਂਦਾ ਜਿਹੜਾ ਜਹਿਦਾ ਤੇ ਇਲਜ਼ਾਮ ਪਾਉਂਦਾ ਚਾਹੇ ਝੂਠਾ ਕਹੇ ਸੱਚਾ ਲਾਉਂਦਾ। ਦੰਤ ਤਾਂ ਸਾਦੀ ਹੋਈ ਹੈ। ਜਿਹੜਾ ਬੰਦਾ ਇਲਜ਼ਾਮ ਲਾਉਂਦੇ ਨੇ ਚਾਹੇ ਝੂਠੇ ਨੇ ਜਾਂ ਸੱਚੇ ਨੇ ਪਰ ਆਗਣਾ ਵੜਿਆ ਥੋੜੇ ਥੋੜੇ। ਗੱਲ ਚੱਲ ਕਿਵੇਂ ਪਈ? ਬਿਲਕੁਲ ਝੂਠਾ ਤਾਂ ਕੁਝ ਉੱਦਾ ਨਹੀਂ ਖੈਰ। ਕੋਈ ਸੱਚ ਕੋਈ ਝੂਠ ਹੋ ਸਕਦਾ। ਬਿਲਕੁਲ ਝੂਠ ਨਹੀਂ ਚੱਲਦਾ। ਕੁਝ ਦਾ ਸੱਚ ਥੋੜਾ ਬਹੁਤ ਜਰੂਰ ਹੋ ਸਕਦਾ ਵਿੱਚ ਜੇ ਤੁਹਾਨੂੰ ਕੋਈ ਚਾਰ ਕੋਟ ਉੱਠ ਸੋ ਤਾਂ ਹਰ ਸੇਵਾ ਦੇ ਸੋ ਤਾਂ ਹਰ ਸੇਵਾ ਦੇ ਭਾਗ ਉਹ ਤਾਂ ਹਰ ਸੇਵਾ ਦੇ ਵਿੱਚ ਹੀ ਜਾਣਾ ਉਹ ਆਪੇ ਮਿਲਣਾ ਉਹ ਤੁਮ ਹਰ ਸੇਵਾ ਪਰ ਇਹ ਕੀ ਕਰਦੇ تھے ਅਸਲ ਕੇ ਜੋਗੀ ਨੂੰ ਵੀ ਕਹੀ ਹੋਈ ਗੱਲ ਹੈ ਕਿ 타ਗਾ ਬਿਸ਼ਰੂਪ ਜਿਹਦਾ ਬਿਸ਼ਰੂਪ ਭਗਤਾਂ ਨੇ ਗੱਲ ਕਹੀ ਕਿਸ ਰੂਪ ਤਾਂ ਨੂੰ ਗੱਲ ਕਹੀਏ ਇਹ ਤਾਂ ਦਾ ਇਸ ਤਰੀ ਜਿਹੜੇ ਰਾਜ ਪ੍ਰਬੰਧ ਵਾਲੇ ਨੇ ਉਹਨਾਂ ਨੂੰ ਗੱਲ ਕਹੀਏ ਫਿਰ ਤਾਂ ਇਹ ਹੈ ਤਬ ਉਹ ਰਾਜ ਰਾਜਾਂ ਰਾਜ ਨੇ ਤਬ ਉਹ ਰਾਜ ਹੂ ਜੇ ਤੱਪ ਕਰਦਾ ਆ ਵਾਸਤੇ ਉਹ ਤਰੂ ਨਾਲ ਵੀ ਅਹੀਂ ਜੋੜੀ ਹੋ ਜਾਣਾ ਵੇ ਰਾਜ ਬਣ ਗਿਆ ਰਾਜ ਲੈ ਲਿਆ ਤਾਂ ਇਹ ਜੋੜੀ ਹੋਈ ਜਗਾ जे ਤੂੰ ਰਾਜ ਚਾਹੁੰਦਾ ਹੈ ਰਾਜ ਖਾਤਾ ਤਪ ਕਰਦੇ ਰਹੇ ਨੇ ਇਹ ਲੋਕ ਇੱਧਰ ਦੀ ਬਦਮੀ ਲਾਣੀ ਹੈ ਤਪ ਕਰਦਾ ਉਹਦਾ ਤਪਾਂ ਕਰੀਏ ਉਹ ਜਿਹੜੇ ਪਿੱਛੇ ਚਲਦੀਆਂ ਕਹਾਣੀਆਂ ਉਹਨਾਂ ਤੇ ਅਟੈਚ ਕੀਤੇ ਹਨ ਚਾਰ ਕੋਟਾ ਦੇ ਵਿੱਚ ਫਿਰਦਾ ਹੈ ਜਿਹੜੀ ਸੰਸਾਰੀ ਧੰਨ ਵਾਸਤੇ ਜੇ ਤਪ ਕਰਦਾ ਫਿਰਦਾ ਹੈ ਉਹਦਾ ਕਾਬਲ ਉਹ ਨਾਮ ਤਾਂ ਹਰ ਸੇਵਾ ਤੇ ਪਾ ਲੈਣਾ। ਹਾਂ? ਕਿੰਨੀ ਗੱਲਾਂ। ਨਾ, ਜਿਸ ਤੁਹਾਨੂੰ ਕੋਈ ਚਾਰ ਕੋਟ ਉਠਤავੈ, ਸੋ ਤੁਹਾਨੂੰ ਹਰ ਸੇਵਾ ਤੇ ਪਾਵੇ। ਚਾਰ ਕੋਟਾਂ ਵਿੱਚ ਜਿਹੜੇ ਤਾਂ ਵਾਸਤੇ ਤੂੰ ਫਿਰਦਾ ਹੈਂ, ਸੋ ਤੁਹਾਨੂੰ। ਜੇ ਤਾਂ ਫਿਰਦਾ ਨਾ, ਜੇ ਤਾਂ ਫਿਰਦਾ ਜਾਣ ਵਾਸਤੇ। ਪ੍ਰਭ ਗਿਆਨੀ ਕੋ ਖੋਜੇ ਮਹੇਸਰ। ਜਦੋਂ ਆ ਜਿ ਫਿਰਦਾ ਹੈ ਮੈਨੂੰ ਨਾਮ ਮਲੇ ਕਿਤੇ ਉਹ ਤਾਂ ਹਸੇ ਸੇਵਾ ਗੱਲ ਹੈ ਤੈਨੂੰ ਘਰੇ ਮਿਲ ਜੂ ਬਾਹਰ ਦੀ ਲੋੜ ਨਹੀਂ ਜੇ ਇਹਦੇ ਖਾਤਰ ਫਿਰਦਾ ਜੇ ਸਾਣਾ ਕਿਹੜੇ ਖਾਤਰ ਫਿਰਦਾ ਨਹੀਂ ਪਤਾ ਹੈਗਾ ਤੂੰ ਕਿਹੜੇ ਖਾਤਰ ਫਿਰਦਾ ਇਹ ਨਹੀਂ ਪਤਾ ਦੋਹਾਂ ਜੋ ਕਿਹੜੇ ਵਾਤੇ ਫਿਰਦਾ ਇਹ ਫਿਰਦਾ ਜਿਹੜਾ ਪੱਜਿਆ ਫਿਰਦਾ ਨਾ ਗੱਲ ਇਸ ਕਰਕੇ ਦੋਏ ਤਾਨਾ ਦੀ ਗੱਲ ਕਰਾਂਗੇ ਹੁਣ ਉਹ ਤਾਨਾ ਉਹ ਤਾਨਾ ਹਾਂ ਜੇ ਤੂੰ ਡਰਾਕਾਰੀ ਜੇ ਤੂੰ ਨਾ ਬਸ ਤੇ ਫਰਦਾ ਕੰਮ ਹੀ ਹਰ ਦੇ ਤਾਂ ਵੀ ਹਰ ਸੇ ਕਰਦੀ ਜਾ ਜਿਹੜਾ ਮੈਨੂੰ ਲੱਗਦਾ ਆਪੇ ਮਰ ਜਾਣਾ ਉਹ ਤਾਂ ਹੁਕਮ ਨਾਲ ਮਰੇ ਜਾਣਾ ਫਿਰ ਤੁਹਾਨੂੰ ਭੱਜਣ ਦੀ ਲੋੜ ਨਹੀਂ ਤੈਨੂੰ ਸਮਝ ਆ ਜੂ ਜੋ ਹੁਕਮ ਨਾਲ ਮਿਲਣਾ ਉਹ ਮਿਲਣਾ ਹੀ ਆ ਫਿਰ ਦੇਖ ਕੇ ਭਜਣਾ ਇਹ ਗੱਲ ਆ ਫੇਰ ਤੈਨੂੰ ਭੱਜਣ ਦੀ ਲੋੜ ਨਹੀਂ ਫੇਰ ਤੈਨੂੰ ਹੂ ਤਸੱਲੀ ਹੋ ਜੂ ਕੋਈ ਜਿਹੜਾ ਫੇਰਾ ਹੈ ਕਰਮਾਂ ਤੇ ਨਹੀਂ ਜਾਂਦਾ ਮੇਰਾ ਜਿਹੜਾ ਮੁਕੱਦਰ ਉਹ ਨਹੀਂ ਕਿਤੇ ਜਾਂਦਾ ਤੂੰ ਚੁੱਪ ਕਰਕੇ ਆਰਾਮ ਨਾਲ ਠਹਿਰ ਕੇ ਬਹਿ ਜਾ ਹਾਂ ਚਾਰ ਘੰਟੇ ਭੱਜਣ ਦੀ ਲੋੜ ਹਾਂ ਜਿਸ ਸੁਖ ਕੋ ਜਿਸ ਸੁਖੋ ਜਿਹੜੇ ਦੇਖਣਾ ਨਿਤ ਇੱਛਾ ਰੱਖਦਾ ਪਾਂ ਜੇ ਛੇ ਰੱਖਦਾ ਜਿਹੜੇ ਸੁਖ ਦੀ ਧਨ ਵਾਸਤੇ ਸੁਖ ਹੈ ਨਾ ਜੇ ਤਾਂ ਧਨ ਸੰਸਾਰੀ ਵਾਸਤੇ ਸੰਸਾਰੀ ਚ ਸੁਖ ਬਾੜਦਾ ਜੇ ਤਾਂ ਵੀ ਦੋਏ ਤਾਂ ਨਿਰਾਕਾਰੀ ਤੋਂ ਬਾੜਦਾ ਨਾਫ ਤੋਂ ਸੁਖ ਬਾੜਦਾ ਤੂੰ ਸਾਧੂ ਸੰਤ ਪ੍ਰੀਤ ਕਰ ਲੈ ਤੋਏ ਪ੍ਰਕਾਸ਼ ਦਾ ਸੁਖ ਹੋ ਜੂਗਾ ਜੇ ਸਾਧੂ ਸੰਗ ਪ੍ਰੀਤ ਹੈ ਤਾਂ ਤੇਰਾ ਜਿਹੜਾ ਸੰਸਾਰੀ ਤੁਹਾਨੂੰ ਉਹ ਵੀ ਸੋਖਦਾਇਆ ਰਹੂਗਾ ਫਿਰ ਤੈਨੂੰ ਦੁੱਖ ਨਹੀਂ ਦਿੰਦਾ ਫਿਰ ਉਹ ਸੰਸਾਰੀ ਤਾਂ ਤੇਰਾ ਚਿੰਤਾ ਦਾ ਕਾਰਨ ਨਹੀਂ ਬਣਦਾ ਅਸਲ ਤੇ ਸੰਸਾਰੀ ਦਾ ਚਿੰਤਾ ਦਾ ਕਾਰਨ ਬਣ ਜੁਦਾ ਸੰਸਾਰੀ ਤਾਂ ਚਿੰਤਾ ਦਾ ਕਾਰਨ ਨਾ ਬਣੇ ਉਹ ਗੱਲ ਦਾ ਹੀ ਇਲਾਜ ਹੈ ਹੋਰ ਕੁਝ ਨਹੀਂ ਇਸ ਪਦੇ ਦੇ ਵਿੱਚ ਸੰਸਾਰੀ ਤਾਂ ਜਿਹੜਾ ਤੁਹਾਨੂੰ ਜਿਸ ਜਿਸ ਬਹੁਤ ਜਿਸੇ ਕਰੇ ਇਹ ਬਚਿਆ ਜਾਣਾ ਬਹੁਤ ਹੁੰਦੇ ਹੋਏ ਵੀ ਚਿੰਤਾ ਨਾ ਹੋਵੇ ਇਹ ਧੋਖੇਵੇਂ ਬਚਾ ਜਾਣਾ ਇਹ ਪਤਾ ਇਸ ਐਸੇ ਐਂਗਲ ਤੋਂ ਲੈ ਹਾਂ ਸਾਧੂ ਸੰਗ ਪ੍ਰੇਤ ਸਾਧੂ ਸੰਗ ਪ੍ਰੇਤ ਐਸੇ ਐਂਗਲ ਤੇ ਲੈਣਾ ਧੂਏ ਤੋਂ ਨਹੀਂ ਲੈਣਾ ਜੇ ਨਾਲ ਧੂਆ ਤਾਂ ਵੀ ਹੈ ਉਹ ਕਿਵੇਂ ਬਚ ਜਾਣਗੇ ਧੂਏ ਚਿੰਤਾ ਤੁੰਗ ਸਾਧੂ ਸੰਗ ਪ੍ਰੇਤ ਸੁਖ ਉਹ ਮਿਲੂ ਤੈਨੂੰ ਤਾਂ ਧੂਆ ਜਨਾ ਮਰਜੀ ਹੋਵੇ ਚਾਹੇ ਹੋਵੇ ਚਾਹੇ ਨਾ ਹੋਵੇ ਇਕਦਾ ਇਕਦਾ ਉੱਠ ਕੇ ਭਜਨ ਲੱਗ ਭਜਨ ਲੱਗ ਕਦਮ ਹੋ ਵੀ ਹੋ ਜਾਂਦਾ ਕਦਮ ਹੋਊਗੀ ਜੇ ਥੋੜੀ ਹੈ ਪਰਮੁਲਤਾ ਜਿਹੜਾ ਫਿਰਦਾ ਹੈ ਪਰਮੁਲਤਾ ਦਾ ਥੋੜੇ ਵਾਲਾ ਫਿਰਦਾ ਥੋੜੇ ਵਾਲਾ ਦੋਹੜ ਜਾਊਗਾ ਬਹੁਤੀ ਵਾਲਾ ਬਸ ਆ ਗੱਲ ਇਸ ਗੱਲ ਦਾ ਇਲਾਜ ਹੈ ਹਾਂ ਦੋਵੇਂ ਬਗਵਾਨ ਜਿਹੜਾ ਮੁਕਤਸ ਹੋਈ ਜੇ ਇਹ ਗੱਲ ਦਾ ਇਲਾਜ ਹੈ ਸਿਰਫ ਇਸ ਪਦੇ ਕਿਤੇ ਉਸ ਟੀਕ ਇਸ ਪਦੇ ਉਹ ਬੰਦਾ ਜਿਹੜਾ ਨਾ ਉਹ ਜਿਹੜੀ ਗੱਲ ਖੜੀ ਕੀਤੀ ਹੈ ਜਿਸ ਕਰ ਕਿਤੇ ਵੀ ਉੱਥੇ ਇਲਾਜ ਨਹੀਂ ਹੋ ਰਿਹਾ ਇੱਥੇ ਹੀ ਰੱਖਣਾ ਸੂਈ ਇਸ ਚੀਜ਼ ਦਾ ਇਲਾਜ ਆ ਕਰੇ ਭਲੀ ਕਰਨੀ ਸੋਭਾ ਭਜ ਹਰ ਕੀ ਭਲੀ ਕਰਨੀ ਕਰਦਾ ਤੂੰ ਸੁਭਾਅ ਵਾਸਤੇ ਸੁਭਾਅ ਵਾਸਤੇ ਉਹ ਲੋੜ ਨਹੀਂ ਕਰਦੀ ਸੁਭਾਅ ਵਾਸਤੇ ਭਲੀ ਕਰਦੀ ਲੱਗਦਾ ਲਾਉਣੇ ਜਿਹੜੀ ਉਹ ਕਰਦਾ ਹੈ ਕਰ ਸੇਵਾ ਕਰਦਾ ਹੈ ਇਹ ਉਹ ਕਰਦਾ ਹੈ ਜੋ ਦਿਖਾ ਜੋ ਧਰਮ ਦੇ ਕਰਮ ਕਰਦਾ ਕਰਮ ਧਰਮ ਪਾਖੰਡ ਜੋ ਕਰਮ ਧਰਮ ਪਾਖੰਡ ਕਰਨਾ ਹੈ ਵਾਸਤੇ ਕੋਈ ਭਲੀ ਕਰਨੀ ਆ ਲੋਕ ਤਾਂ ਭਲੀ ਕਹਿੰਦੇ ਨੇ ਨਾ ਭਲੀ ਕਰਨੀ ਭਲਾਵਾਂ ਨੇ ਕਹੀ ਕਹਿੰਦੇ ਬੁਰਾ ਨਹੀਂ ਕੋਈ ਕਹਿੰਦਾ ਕਰਦਾ ਫਰੋਦਨਾ ਤੇ ਨੁਕਸਾਨ ਕੀ ਹੋਊਗਾ ਹੰਕਾਰ ਹੋ ਜਾਊਗਾ ਰਿਐਕਸ਼ਨ ਹੋ ਜਾਊਗਾ ਤੈਨੂੰ ਕਿ ਐ ਨਾ ਕੀਤੀ ਤਾਂ ਰਿਐਕਸ਼ਨ ਹੋ ਜਾਊਗਾ ਕਿ ਐ ਰਿਐਕਸ਼ਨ ਜੇ ਸੋਪਾ ਕੋ ਕਰੇ ਭਲੀ ਕਰਨੀ ਕਰਦੀ ਤਾਂ ਕਰੀ ਜਾ ਚਾਹੇ ਭਲੀ ਕਰਨੀ ਤਾਂ ਕਰੀ ਚਾਹੇ ਪਰ ਸੋਪਾ ਹੋ ਹਰ ਕੀ ਚੱਲਣੀ ਆ ਸੋਭਾ ਭਾਜਾ ਕਿਉਂਕਿ ਸੰਸਾਰ ਚ ਜੇ ਸੋਭਾ ਹੋਊ ਉਹ ਝੂਠੀ ਐ ਦਰਗਾਹ ਚ ਸੋਭਾ ਅਰ ਸੰਸਾਰ ਸੋਭਾ ਧੋਏ ਜਗਾ ਸੋਭਾ ਸੰਸਾਰ ਦੇ ਵਿੱਚ ਸੋਭਾ ਇੱਕ ਹੁੰਦੀ ਐ ਘਰ ਦੇ ਵਿੱਚ ਸੋਭਾ ਉਹ ਘਰ ਦੇ ਵਿੱਚ ਹੋਰ ਇਹ ਗੱਲ ਦੀ ਵਿਆਖਿਆ ਦਸ ਪਾਸ਼ਾ ਨੇ ਕੀਤੀ ਹੋਈ ਐ ਇੱਕ ਜਗ੍ਹਾ ਹੋਰ ਕਿਤੇ ਨਹੀਂ ਆਉਣੀ ਗੁਰੂ ਜੀਾਂ ਸਾਹਿਬ ਜੀ ਮੇਰੇ ਅਧਿਆਪਨ ਹੋਰ ਕਿਤੇ ਨਹੀਂ ਹਾਂ ਜਿੱਥੇ ਤੱਕ ਆਪਾਂ ਬਚਾਰੇ ਉਹ ਤਾਂ ਕੀਤਾ ਜਾਂ ਖਾਲਸਾ ਨੂੰ ਗਿਆ ਤੇ ਦਸਬਈਏ ਨੇ ਉਹਦੇ ਵਿੱਚ ਜਦੋਂ ਕਹਿੰਦੇ ਨੇ ਵੀ ਦਾਨ ਦਿਓ ਇਨਹੀ ਕੋ ਪਲੋ ਹਾਂ ਤੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨੂੰ ਜੀ ਕੋ ਖਾਲਸਾ ਨਮੋਦਰ ਕਰਕੇ ਕਹਿੰਦੇ ਵੀ ਮੇਰੇ ਪੰਡਤ ਨੂੰ ਨਹੀਂ ਨ ਦਿੱਤਾ ਗਿਆ ਉਹਨੂੰ। ਦੱਛਣਾ ਪਹਿਲਾਂ ਹਮੇਸ਼ਰ ਜੀ ਦਾ ਪੰਡਤੇ ਗੁੱਸਾ ਰਾਜ ਹੋ ਗਿਆ। ਉਦੋਂ ਫਿਰ ਕਹਿੰਦਾ ਨਾ ਵੀ ਜਿਹੜਾ ਬੇਰਾ ਮਨ ਹੈ ਉਹਦੇ ਚ ਇਹ ਆ ਵੀ ਜਿਹੜਾ ਖਾਲਸਾ ਇਹ ਬਪਨਾ ਦਾ ਕੰਮ ਪੰਡਤਾਂ ਇਹ ਕਰਦਾ। ਕਰਦਾ ਵੀ ਇਹ ਦੋਏ ਕੰਮ ਕਰਦਾ। ਤੁਸੀਂ ਆਪਣਾ ਕੰਮ ਛੱਡ ਗਏ ਤੇ ਛਤਰੀਆਂ ਵਾਲਾ ਕੰਮ ਇਹ ਕਰਦਾ ਪੰਡਤਾਂ ਆ ਵੀਰਾ ਦੋ ਡਿਊਟੀਆਂ ਕਰਦਾ। ਉਹਨਾਂ ਇਸ ਕਰਕੇ ਇਹਨਾਂ ਦੀ ਸੇਵਾ ਕਰਨੀ ਮੈਨੂੰ ਚੰਗੀ ਲੱਗਦੀ ਹੈ ਮੈਂ ਨਾ ਕਿ ਉਹ ਸੇਵਾ ਬਾਬਾ ਨਾਲ ਕੀਤੀ ਹਾਲਾਂਕਿ ਉਹਦੇ ਵਿੱਚ ਮੁਸਲਮਾਨ ਵੀ ਨੇ ਬੁੱਤ ਜਹਾ ਦੇ ਬੰਦੇ ਵੀ ਬੁੱਤ ਜਹਾ ਦੇ ਬੰਦੇ ਵੀ ਨਾ ਜਿਹਨਾਂ ਸਿਰੋਪੇ ਦਿੱਤੇ ਨੇ ਉਹਦੋਂ ਉਹ ਲੜੇ ਦੀ ਕਿਤੇ ਜਾ ਕੇ ਉਹ ਵੀ ਬੱਚੇ ਨੇ ਤਾਂ ਕਦਰ ਸੇਵ ਕਰੀ ਇਹਨਾਂ ਭਾਵਤ ਔਰ ਕਿਸੇ ਸੇਵਾ ਸੁਹਾਤਰ ਜੀ ਕੋ ਹੋਰ ਕਿਸੇ ਦੀ ਸੇਵਾ ਕਰਦੀ ਮੇਰੇ ਜੀ ਅੰਦਰ ਅੰਦਰ ਨਹੀਂ ਲੱਗਦੀ দান ਦਿਓ ਇਨਹੀ ਕੋ ਪਲੋ ਔਰ ਆਣ ਕੋ ਦਾਨ ਨਾਲ ਲੱਗਤ ਨਹੀਂ ਕੋ ਹੋਰ ਨੂੰ ਦਾਨ ਦਵਾ ਮੈਨੂੰ ਸੋਹਣਾ ਨਹੀਂ ਲੱਗਦਾ ਮੈਨੂੰ ਚੰਗਾ ਨਹੀਂ ਚੱਲਿਆ ਇਹਨਾਂ ਨੂੰ ਦਾਨ ਤੇ ਤਾਈ ਪਲ ਆਗੇ ਭਲਾ ਇਨਹੀ ਕੋ ਦੇਓ ਦੇਖੋ ਆ ਲੱਗਦਾ ਆਏ ਆ ਸਭ ਆ ਇੱਥੇ ਆ ਯਸਤੀ ਗੱਲ आगे फला है, जे अगे दी फड़ लेना ना तुसी दरगा दा इदी ही को देओ जग में जस औल्टी हो सब ठीक हो पर जास जास और गल जगदा जस जरूर हो वो फिका कर अरजी सुने सोना लवाता जस फिका हो गया जी नुकसान होया ओदा फायदा नहीं हो ओ तो बल्ले बल्ले सी कुण भी लोग बेखुब बल्ले बल्ले करते थे ओ सुन ध्यान नाम तो हटा दो रुको ਉਹ ਜਿਹੜਾ ਸੋਨਾ ਲਵਾਇਆ ਨਾ ਉਹਨੇ ਨਾਮ ਤੋਂ ਧਿਆਨ ਹੀ ਹਟਾ ਦਿੱਤਾ ਲੋਕਾਂ ਦਾ ਕਿਹਾ ਨੇ ਪਰ ਇਹ ਤਾਂ ਰੀ ਬਣਾ ਤੇ 16 ਦੇਖਦੇ ਨੇ ਲੋਕ ਸੁਣਦੇ ਹੀ ਨਹੀਂ ਕਿ ਥਾ ਕੀ ਹੋ ਰਹੀ ਹੈ ਕੀ ਕੀ ਹੋ ਰਹੀ ਅੱਖਾਂ ਕੰਮ ਕਰਦੀਆਂ ਨੇ ਤਨ ਵੱਧ ਹੋ ਜਾਂਦੇ ਨੇ ਸਾਰਿਆਂ ਦੇ ਜਿਹੜੇ ਆਦਮੀ ਜਾ ਕੇ ਦਰਬਾਰ ਸਾਹਿਬ ਪੜਦੇ ਨੇ ਉਪਰ ਸਾਹਿਬ ਜਾਣਦੇ ਨੇ ਉਹਦੇ ਕੰਨ ਨਹੀਂ ਕੰਮ ਕਰਦੇ ਅੱਖਾਂ ਕੰਮ ਕਰਦੀਆਂ ਘੰਟਾ ਤੋਂ ਘੰਟੇ ਰਹਿਣ ਦੇ ਉਹਾਂ ਦੇ ਖੁਦ ਤੋਂ ਸਵੇਰ ਤੱਕ ਕੰਮ ਹੀ ਨਹੀਂ ਕਰਦੇ ਜਦ ਕਿ ਕਰਨਾ ਜ ਕੋ ਸੁਣਨ ਗਏ ਤੇ ਅੱਖਾਂ ਤੇ ਕੀ ਲੈਣਾ ਸੀ ਤੁਸੀਂ ਬੱਸ ਉਹ ਜਿਹੜੀ ਸਰਬਣ ਤੇ ਸਰਬਣ ਸ਼ਕਤੀਓਂ ਬੰਦ ਕਰਤੀ ਸੋਣ ਸ਼ਕਤੀਓਂ ਬੰਦ ਕਰ ਦਿੱਤ ਜੇ ਲਾਭ ਹੋਣਾ ਸੀ ਆਉਣਾ ਨੁਕਸਾਨ ਕੀਤਾ ਉਹਦੋਂ ਵੱਲੇ ਵੱਲੇ ਸੀ ਇਸ ਕਰਕੇ ਦਰਗਾਹ ਦੇ ਵਿੱਚ ਉਹਦਾ ਨੁਕਸਾਨ ਹੋਇਆ ਦਰਗਾਹ ਜਨੂਬਾਂ ਰਿਜਰਟ ਵੀ ਰਜੀਸ ਸਿੰਘ ਦੇ ਆ ਗਿਆ ਜਦ ਇਹ ਸੱਜਾ ਬਿਮਲਗੀ ਛੇਤੀ ਹੋ ਕੋਈ ਨੀ ਹੈ ਪਿੱਛੇ ਰਿਹਾ ਬਹੁਤ ਛੇਤੀ ਹੀ ਸਮਾਪਤ ਹੋ ਗਿਆ ਸਭ ਕੁਝ ਪਿੱਛੇ ਜਗਮਾ ਜਸ ਔਰ ਦਿਓ ਸਭ ਫਿੱਕੋ ਜਸ ਫਿੱਕਾ ਜਸ ਹੁੰਦਾ ਇਹ ਸਾਰਾ ਜਸ ਜਗ ਹੀ ਹੈ ਇਹਨਾਂ ਦਾ ਸਤਿ ਦਾ ਦਰਗਾਹ ਦਾ ਜਸ ਬਿਲਕੁਲ ਬੜੀ ਹੈ ਜੇ ਆਦੀ ਸਾਧੂ ਸੰਗ ਪ੍ਰੀਤ ਹੈ ਦੀ ਸੋਖਕ ਸਾਧੂ ਸੰਗ ਜਿਸ ذوبا ਕੋ ਕਰੈ ਭਲੀ ਕਰਨੀ ਕਰਨੀ ਸਾ ਸੋਭਾ ਭਜ ਹਰ ਕੀ ਸਾਂਭਾ ਆ ਸੋਭਾ ਭਜ ਹਰ ਕੀ ਸੜਨੀ ਹਰ ਕੀ ਸੜਨ ਤੋਂ ਉਹਨੇ ਲਈਓ ਦੀ ਹਰ ਕੀ ਸੜਨੀ ਲਈ ਆਪਣੀ ਸਿੰਘ ਨੇ ਮਾਇਆ ਦੀ ਸੜਨ ਲਈ ਅੰਗਰੇਜ਼ਾਂ ਦੇ ਉਹ ਸੁਲਾਕਾਲ ਦੀ ਐਂਦੀ ਕਬਰੋ ਗੁਰਮਤ ਛੱਡ ਦਿੱਤੀ ਮਾਇਆ ਵਾਸਤੇ ਸੱਚ ਛੱਡ ਦਿੱਤਾ ਝੂਠ ਵਾਸਤੇ ਕੰਪਰੋਮਾਈਜ਼ ਕਰ ਲਿਆ ਮੇਣੇ ਮਾਣੇ ਸਭ ਇਕੱਠੇ ਕਰ ਲਏ ਜਿਹੜਾ ਹੁਕਮ ਸੀ ਦਸਮ ਪਾਸ਼ਾ ਦਾ ਮੇਣਿਆਂ ਨਾਲ ਮੇਲ ਨੀ ਗੱਲ ਸਾਰੇ ਹੀ ਸਿੱਖ ਬਣਾ ਕੇ ਆਪੇ ਮੇਣੇ ਸੀ ਆਪੇ ਘੜਾ ਥੀ ਸੀ ਖਾਲਸਾ ਅਟਕਣ ਦਿੱਤਾ ਮੇਣੇ ਪ੍ਰਧਾਨ ਬੁਲਾਉਂਦੇ ਉਦੋਂ ਨਾਲ ਮੇਣਿਆਂ ਦੀ ਪ੍ਰਧਾਨਗੀ ਰਜੀਸ਼ ਸਿੰਘ ਵਿਸਲਾ ਬੇੜਿਆਂ ਦੀ ਰਣਜੀਤ ਸਾਧੀ ਇਹਨਾਂ ਦੀ ਬਿਸਰਾਣਿਆਂ ਦੀ ਮੀਣੇ ਉੱਤੇ ਕੀਤੇ ਦਾ ਜੋ ਤੱਕ ਮੀਣੇ ਉੱਤੇ ਹੀ ਨੇ ਮੈਨਾ ਦਾ ਪ੍ਰਚਾਰ ਉੱਤੇ ਕਰਦਾ ਵੀ ਸਰਾਣਿਆਂ ਨੇ ਹੁਣ ਥੇ ਉਹ ਪ੍ਰਚਾਰ ਉਹੀ ਹੈ ਪਾਸਾ ਪਲਟ ਹੋਇਆ ਹੀ ਨਹੀਂ ਹੁਣ ਪੜਟੂਗਾ ਬਸ ਕੋਈ ਦਾ ਰੌਲਾ ਪੈ ਗਿਆ ਨਾ ਸਿੱਖੀ ਕਿੱਥੇ ਗਈ ਇਹਨਾਂ ਘਰ ਉਹ ਜਿਹਨੂੰ ਲੋੜਾ ਸਿੱਖੀ ਲੈ ਰੋ ਬਾਕੀ ਕੜਾ ਸਾਰੇ ਲੈਤੇ ਹੁੰਦੇ ਨੇ ਜਿਹੜੇ ਜਾਦਾ ਰੌਲਾ ਬੋਲਣੇ ਸਿੱਖੀ ਗਈ ਉਹਨਾਂ ਦਾਸੀ ਹੁਣ ਦੇਖ ਲਿਆ ਵੀ ਉਹ ਸਿੱਖੀ ਗ੍ਰਾਂਡ ਕਰਦੇ ਨਾ ਇਧਰ ਰੌਲਾ ਹੀ ਹੈ ਬੋਲਣ ਤੇ ਤੇ ਚੁੱਪ ਹੋ ਜਾਣਗੇ ਸਿੱਖੀ ਕਿੱਥੇ ਗਈ ਸਿੱਖੀ ਕੱਢ ਕੇ ਚੁੱਪ ਕਰਕੇ ਬਹਿ ਜਾਣਗੇ ਘਰ ਜਾਂ ਫਿਰ ਦੇਣ ਆ ਹਾਂਜੀ ਰੋਗ ਨਾ ਜਾਏ ਰੋਗ ਬਿਟੇ ਰੋਗ ਨਾ ਜਾਏ ਉਹ ਬਹੁਤ ਕਰ ਰਹੇ ਨੇ ਰੋਗ ਕਰਮ ਦੇ ਕਰਮ ਬਹੁਤ ਕਰ ਰਹੇ ਨੇ ਹੋਮੇ ਦਾ ਰੋਗ ਨਹੀਂ ਜਾ ਰਿਹਾ ਕਿਸੇ ਦਾ ਉਹ ਬਾਤ ਬਹੁਤ ਕਰ ਰਹੇ ਨੇ ਮੱਤਾ ਬਹੁਤ ਨੇ ਫੱਟ ਬੜੇ ਉਹ ਬਾਤ ਦੱਸਦੇ ਨੇ ਰੋਗ ਸੰਤਾ ਦਾ ਨਹੀਂ ਜਾ ਰਿਹਾ ਕੋਈ ਸੰਤ ਹੋਣੇ ਜਿਹੜੇ ਰੋਗ ਨੂੰ ਬਾਦੂਆ ਰੋਗ ਇਹ ਤਾਂ ਬੈਦ ਦੇ ਮਰਦੇ ਨੇ ਬੈਦ ਰੋਗੀ ਬਾਦ ਚ ਮਰਦਾ ਇਹ ਜਿਹੜੇ ਉਪਾਲੇ ਬੈਦ ਨੇ ਇਹ ਸਾਰੇ ਮਰਦੇ ਨੇ ਜਾ ਬੈਲੇ ਮਰ ਗਿਆ ਤੇ ਉਹਦਾ ਬੈਲ ਦਾ ਇਲਾਜ ਕਰਨ ਨਾਲ ਦਾਫੇ ਮਰਦਾ ਜਿਹੜੀ ਉਹ ਜਿਹੜੀ ਦਵਾਈ ਬੈਲ ਖਾਂਦਾ ਹੈ ਵੀ ਅਬਰ ਕਰ ਦੂੰਗਾ ਮੈਂ ਤੈਨੂੰ ਕਿ ਉਹ ਹੀ ਮਰ ਗਿਆ ਉਹਦਾ ਰੋਕੀ ਕਿ ਮੈਂ ਬਚੂ ਕੋ ਉਹ ਆ ਸਭ ਸੰਸਾਰ ਇਸ ਤਰੀਕੇ ਨਾਲ ਸਾਰੇ ਹੀ ਸੰਸਾਰ ਮਰ ਗਿਆ ਇਹ ਕਬੀਰਾ ਨਾ ਉਹ ਜਸਨਾ ਹੈ ਉਹ ਆਪੇ ਵਰਸੀਆਂ ਬਣਾ ਕੇ ਹਾਂ ਹਾਂ ਵਰਸੀਆਂ ਬਣਾਉਂਦੇ ਮੌਲ ਨਹੀਂ ਉਹ ਉਹ ਕਿਹੜਾ ਕਹਿੰਦਾ ਨੇ ਜੇ ਵਰਤੀ ਨਾਮਣਾਉਣ ਦਾ ਕਾਠੀਕਲ ਨੇ ਆਦ ਕੀ ਕਰਨ ਦੂਏ ਪਾਸ ਫਿਰ ਉਹ ਉਹਦਾ ਇੱਕ ਆਮਦਤ ਦਾ ਸਾਧਨ ਬਣਾਇਆ ਹੈ ਨਾ ਹਾਂ ਹਾਂ ਜੀ ਅਨਕੋ ਉਬਾਵੀ ਨਾ ਜਾਏ ਰੋਗ ਮਿਟੇ ਹਰ ਅਵਗਤ ਬਣਾਈ ਅਨਕੋ ਨਾ ਜਾਏ ਮੇਗਾ ਪਾਪ ਕਰ ਰਹੇ ਨੇ ਰੋਗ ਜਾਦੀ ਰਿਹਾ ਕਿਸੇ ਦਾ ਕੋਈ ਕੌਮੇ ਛੁੱਟ ਰਹੀ रोग मले रोग मिटे रोग मिटे हर औखद हर औखद दा जडी ना तत्व ज्ञान दी रईल होवे तत्व वस्तु हर औखद शरीर उपयौखद हर औखद ए लावे औखद दा लावणी दी हर दू बीमारी दा हाजमा शरीर नु थोड़ी बीमारी ਰੋਣ ਲੌਣੀ ਸੀ ਉਹਨੂੰ ਐ ਬਿਮਾਰੀ ਐ ਉਹਨੂੰ ਕਿ ਹੰਕਾਰ ਹਰ ਹਰ ਕੌਣ ਆ ਹਰੀਕ੍ਰਿਸ਼ਨ ਆ ਉਹਨੂੰ ਰੋਗ ਮੰਨਣਾ ਕਰਦਾ ਜੇ ਮੈਂ ਮੰਨਣਾ ਨਹੀਂ ਕਰਦਾ ਕਾਰੀਆ ਫਿਰ ਜੇ ਮੈਂ ਕਰਦਾ ਉਹ ਤਾਂ ਹੰਕਾਰੀ ਆ ਹਾਂ ਮੈਂ ਵਿੱਚੋਂ ਜੇ ਤਾਂ ਬੋਲੀ ਸੀ ਇਹੀ ਕਰਦਾ ਜੀ ਇਹ ਹਰੀਕ੍ਰਿਸ਼ਨ ਐ ਉਹ ਕਾਰੀਆ ਰੋਗ ਮਟਾਇਆ ਹਰੇ ਜੇ ਕਰੇ ਸਾਹ ਆਪ ਦਵਾਈ ਲਵੇ ਤਾਂ ਰੋਗ ਮਟੇ ਉਹ ਪਹਿਲਾ ਜਿਹੜਾ ਹੈ ਲਾਹ ਬੈਦ ਬੈ ਦਵਾਈ ਖਾਵੇ ਤਾਂ ਚੇਲੇ ਅੰਦਰ ਰੋਗ ਹਟੇ ਪਹਿਲਾਂ ਬੈਦ ਨੇ ਤਾਂ ਆਪਣਾ ਰਾਜ ਤਾਂ ਕੀਤਾ ਸੀ ਚੇਲੇ ਅੰਦਰ ਕਿਵੇਂ ਕਰ ਜਿਹੜੇ ਹਰ ਕੇ ਭਗਤ ਨੇ ਨਾ ਗੁਰਤੀ ਪੂਜਾ ਵਾਲੇ ਗੁਰਤੀ ਪੂਜਾ ਵਾਲਾ ਜਿਹੜਾ ਗੁਰਤੀ ਉਹ ਭਗਤਾਂ ਦੀ ਜੀਰ ਹੋ ਗਿਆ ਜਿਹੜੇ ਹਰ ਕੇ ਪਾਸ ধੂਏ ਨੇ ਹਰ ਕੇ ਸੰਤ ਨੇ ਉਹਨਾਂ ਦਾ ਰੋਗ ਗਿਆ ਉਹਨਾਂ ਦਾ ਹਰ ਹਿਰਦੇ ਚ ਉਹਨਾਂ ਦਾ ਹਰ ਦੇਹ ਧਾਰੀ ਵਿੱਚ ਹਰ ਦੋ ਪ੍ਰਕਾਰ ਦਾ ਕਿਉਂਕਿ ਹਰ ਉਸ ਵੇਲੇ ਹਰ ਦਾ ਪ੍ਰਚਾਰ ਬਹੁਤ ਜ਼ਿਆਦਾ ਹੈ ਜਿਵੇਂ ਬਾਣੀ ਰਚੀ ਗਈ ਹੈ ਰਾਮचंद ਦਾ ਪ੍ਰਚਾਰ ਨਹੀਂ ਉਹ ਤਾਂ ਕ੍ਰਿਸ਼ਨ ਦਾ ਪ੍ਰਚਾਰ ਹੈ ਉਹ ਜੋ ਦਵਪਰ ਯੁੱਗ ਹੈ ਤੇ ਤਾਂ ਉਹ ਪਿੱਛੇ چلا ਗਿਆ ਲਾਸਟ ਵਿੱਚ ਦਵਪਰ रामचंद्र दा पीछे ज्यादा लागया बहुत क्योंकि योग पीछे है इस करके रामचंद्र ते सूई नहीं आ ज्यादा गुरुवाणी च कृष्ण भक्ति ते सूई ज्यादा प्रचार कृष्ण भक्ति ज्यादा थी हर ला अवसर कृष्ण वास्ते आया रामचंद्र वास्ते नहीं आया हां जी सर्व विधान में हर नाम विधान जप नाम के डर गए परवा सर्व विधान में हर नाम विधान ਸਾਰੇ ਖਜਾਨਿਆਂ ਦੇ ਵਿੱਚ ਜੋ ਹਰਨਾਮ ਹੈ ਹਰੀ ਨਾਮ ਹੈ ਜੋ ਉਹਦਾ ਜਿਹੜਾ ਖਜਾਨਾ ਸਾਰੇ ਖਜਾਨਿਆਂ ਚੋਂ ਹਰਨਾਮ ਦਾ ਨਾਮ ਹੀ ਸੱਚਾ ਖਜਾਨਾ ਬਾਕੀ ਖਜਾਨੇ ਸਭ ਝੂਠੇ ਬਾਕੀ ਗਿਆਨ ਦੇ ਖਜਾਨੇ ਹੈ ਸਿਪਤ ਸ਼ਾਸਤਰਾਂ ਦੀ ਜਾਨ ਹੈ ਗਿਆਨ ਅਸੀਂ ਬਾਹਰ ਇੱਥੇ ਮਾਇਆ ਦੇ ਨਿਦਾਨ ਦੀ ਗੱਲ ਵੈਸੇ ਨਹੀਂ ਕਰ ਸਕਦੇ ਆਯਾ ਦੇ ਜਿਹੜੇ ਹੋਰ ਗ੍ਰੰਥ ਨੇ ਜਿਵੇਂ ਬਾਈਬਲ ਹੈ ਕੁਰਾਨ ਹੈ ਕੁਝ ਵੀ ਗਿਆਨ ਦਦਦਾ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹਰ ਰਾਮ ਨਦਾ ਦੇ ਜਿਹੜਾ ਸਾਡੇ ਕੋਲ ਖਜ਼ਾਨਾ ਗਿਆਨ ਦਾ ਜਿਹੜੇ ਹੋਰ ਖਜ਼ਾਨੇ ਨੇ ਗਿਆਨ ਦੇ ਦੁਨੀਆਂ ਪੱਤਾਂ ਦੇ ਇਹ ਉਹਨਾਂ ਚੋ ਸੇਸ ਇੱਥੇ ਆਹੀ ਗੱਲ ਕਰਨੀ ਜੀ ਧਰਮਾਂ ਦੇ ਜਿਹੜਾ ਖਜ਼ਾਨਾ ਉਹਦਾ ਧਰਮਾਂ ਨਾਲੇ ਕੰਪੀਟੀਸ਼ਨ ਕਰਾਂਗੇ ਸੰਸਾਦੀ ਘਰ ਉਹਦਾ ਕੰਪੀਟੀਸ਼ਨ ਹੀ ਹੋ ਸਕਦਾ ਜਿਹੜੇ ਬਾਕੀ ਮੱਤਾ ਨੇ ਗੁਰਮਤਿ ਦਾ ਕੰਪੀਟੀਸ਼ਨ ਉਹ ਮੱਤਾ ਨਾਲ ਹੈ ਉਹ ਮੱਤਾ ਦੂਜਿਆਂ ਕੋਲ ਵੀ ਗਿਆ ਸਾਡੇ ਕੋਲ ਵੀ ਗਿਆ ਹੈ ਸ੍ਰੀ ਗਿਆਨ ਕੀਦੇ ਕੋਲ ਹੈ ਇਹਨਾਂ ਦਾ ਆਪਸ ਵਿੱਚ ਹੀ ਮੁਕਾਬਲਾ ਹੋ ਸਕਦਾ ਹੈ ਉਹ ਬਾਕੀ ਸੰਸਾਰੀ ਧਰਮ ਨਾਲ ਕੀ ਮੁਕਾਬਲਾ ਹੋ ਜੀ ਹਾਂ ਸਰਬੰਨ ਦਾ ਹਨ ਮੈਂ ਹਾਂ ਜਪ ਨਾਨਕ ਦਰਗਾਹ ਪ੍ਰਵਾਨ ਆ ਲਾਹਣ ਦਾ ਸਾਰੇ ਨਦਾਨਾਂ ਦੇ ਵਿੱਚੋਂ ਸ੍ਰੇਸ਼ਟ ਹੈ ਜਪ ਨਾਨਕ ਦਰਗਾਹ ਪ੍ਰਵਾਨ ਨਾਨਕਾਂ ਦਾ ਜੇ ਜਪ ਲਿਆ ਜਾਵੇ ਗੁਰਬਾਣੀ ਨੂੰ ਸਮਝ ਲਿਆ ਜਾਵੇ ਗੁਰਬਾਣੀ ਦਾ ਜਿਹੜਾ ਗਿਆਨ ਇਹਨੂੰ ਸਮਝ ਲਿਆ ਜਾਵੇ ਇਹ ਦਰਗਾਹ ਜ ਗਿਆਨ ਪ੍ਰਵਾਨ ਹੈ ਬਾਕੀ ਗ੍ਰੰਥਾਂ ਦੇ ਬਾਕੀ ਜਿੰਨੀਆਂ ਮਤਾਂ ਦੇ ਗਿਆਨ ਨੇ ਦਰਗਾਹ ਜ ਪ੍ਰਵਾਨ ਹੈ ਆਏਗਾ ਉਹ ਦੁਆ ਦਾ ਦਰਗਾਹ ਦੇ ਵਿੱਚ ਲੈ ਕੇ ਨਹੀਂ ਜਾਣਾ ਪ੍ਰਵਾਨ ਸਮੇ ਹਜ਼ੂਰ ਅਦੂਆ ਸੰਸਾਰ ਦੇ ਅੰਦਰ ਇੱਕ ਸਰਕੇ ਨਾਮ ਬਨ ਅਗੇ ਲਈ ਖੋਏ ਜਿਹੜੇ ਹੋਰ ਵੀ ਗਿਆਨ ਦੇ ਸਬਰ ਦੇ શાਸਤਰ ਦੇ ਗਿਆਨ ਦੇ ਉਹਨਾਂ ਦਾ ਅਜ ਪ੍ਰਵਾਨ ਨਹੀਂ ਹੈ ਜਿਹੜਾ ਉਹ ਵੀ ਬਾਰਡਰ ਦੇ ਉਰੇ ਕਹਿੰਦੇ ਨੇ ਸਭੇ ਬੁੱਧੀ ਜਾਲੀਆਂ ਰਹਿੰਦੇ ਰਹੇ ਦੱਸ ਗਿਆਨ ਉਹ ਤਾਂ ਦੂਏ ਝੰਬ ਵਿੱਚ ਨਹੀਂ ਜਾਂਦਾ